शलोक महला ਮਹੱਲਾ ਚੌਥਾ ਹਰ ਪ੍ਰਭ ਰਤੇ ਲੋਇਣਾ ਗਿਆਨ ਅੰਜਨ ਗੁਰ ਦੇ ਮੈਂ ਪ੍ਰਭ ਸੱਜਣ ਪਾਇਆ ਜਨ ਨਾਨਕ ਸਹਿਜ ਮਿਲੇ ਹੇ ਪ੍ਰਭ ਦੇਖਣ ਜਗਤੀ ਨੂੰ ਉਹ ਅਰੰਭ ਚੜ ਗਿਆ ਸੱਚ ਦਾ ਹਰ ਦਾ ਹੀ ਅਰੰਭ ਚੜ ਗਿਆ ਗਿਆਨ ਅੰਜਨ ਉਹ ਦੇਈ ਐਸਾ ਗਿਆਨ ਅੰਜਨ ਉਹ ਹੀ ਗਿਆਨ ਅੰਜਨ ਹੈ ਜਿਹੜਾ ਗੁਰਨਾ ਸਤਗੁਰਨਾ ਗਿਆਨ ਅੰਜਨ ਦਿੱਤਾ ਗਿਆਨ ਦਿੱਤਾ ਕੁਰਬਾਨੀ ਦਾ ਉਹ ਹਰ ਲੋਣ ਉਹ ਚੜਿਆ ਬੁੱਧੀ ਨੂੰ ਬੁੱਧੀ ਨੂੰ ਚੜਿਆ ਉਹ ਬੁੱਧੀ ਉਹ ਅੱਖ ਹੈ ਉਹ ਗਿਆਨਦਾਰਾਂ ਦੇ ਚੜ ਗਿਆ ਬੁੱਧੀ ਤੇਜ ਅੱਖ ਦੇ ਤੇਜ ਹੋ ਗਈ ਉਹਦੇ ਨਾਲ ਹੁਣ ਉਹ ਜਿਹੜਾ ਨਹੀਂ ਐਸਾ ਕਾਨੂੰਨੀ ਨਹੀਂ ਸੀ ਉਹ ਦੇਤਰ ਬਣ ਗਏ ਲੋਣਾ ਤੇ ਦੇਤਰੀ ਸਤਗੁਰ ਪੇ ਖੜਾ ਹੁਣ ਉਹਨਾਂ ਨਾਲ ਦੇਖੂਗਾ ਦਰਸ਼ਨ ਹੋਊਗਾ ਬੁੱਧੀ ਦੀ ਲਾਇਕ ਤੇਜ ਹੋ ਗਈ ਹੁਣ ਹੁਣ ਸਮਝ ਆ ਜੂ ਜਿਹੜੀ ਉਦਾਂ ਨਹੀਂ ਸੀ ਪਹਿਲਾਂ ਨਹੀਂ ਸੀ ਹੁਣ ਹੁਣ ਆ ਹਾਂਜੀ ਮੈਂ ਪ੍ਰਭ ਸੱਜਣ ਪਾਇਆ ਨਾਨਕ ਸਹਿਜ ਮਿਲੇ ਦੇਖੋ ਹੁਣ ਆ ਅਗਲਾ ਕਹਿੰਦਾ ਹਾਂ ਕਹ ਰਿਹਾ ਮੈਂ ਪ੍ਰਭ ਸੱਜਣ ਪਾਇਆ ਮੈਂ ਪ੍ਰਭ ਸੱਜਣਾ ਮੈਂ ਪ੍ਰਭ ਕਰ ਲਿਆ ਜਾਂ ਨਾਨਕ ਸਹਿਜ ਮਿਲੇ ਉੱਠੇ ਗਿਆ ਨਾਲੂ ਠਿਕ ਗਿਆ ਦੀ ਨਿਸ਼ਾਨੀ ਬਲਾਪ ਹੈ ਜਾਂ ਨਾਨਕ ਸਹਿਜ ਜੀ ਮਿਲੇ ਸਹਿਜ ਅਵਸਥਾ ਹੈ ਗਿਆ ਇਹ ਬਲਾਪ ਹੈ ਇਹ ਬਲਾਪ ਦੀ ਨਿਸ਼ਾਨੀ ਹੈ ਮੰਨਦਾ ਠਿਕ ਜਾਣਾ ਹੀ ਬਲਾਪ ਦੀ ਨਿਸ਼ਾਨੀ ਹੈ ਹਾਂਜੀ ਮਹੱਲਾ ਚੌਥਾ ਗੁਰਮੁਖੀ ਅੰਤਰ ਸ਼ਾਂਤੀ ਹੈ ਮਨ ਤਨ ਨਾਮ ਸਮਾਏ ਨਾਮ ਚਿਤਵੈ ਨਾਮੋ ਪੜੈ ਨਾਮ ਹੀ ਰਹੈ ਲਿਵ ਲਾਈ ਗੁਰਮੁਖੀ ਉਤਰ ਸ਼ਾਂਤੀ ਆ ਗੁਰਭਾਗ ਦੇ ਅੰਦਰ ਸ਼ਾਂਤੀ ਹੁੰਦੀ ਹੈ ਔਰ ਕਿਦੇ ਹੋਣੀ ਬਾਕੀ ਤਾਂ ਟੋਲਦੇ ਟੋਲਦੇ ਰਹਿ ਜਾਂਦੇ ਨੇ ਮਨ ਸਾਡੀ ਗੁਰੂੰਦਰ ਤਾਨੂੰਦਰ ਨਾਮ ਸਮਾਏ ਮਨ ਔਰ ਤਾਨੂੰਨਾ ਦਾ ਨਾਮ ਦੇ ਵਿੱਚ ਸਮਾਇਆ ਰਹਿੰਦਾ ਉਹਨਾਂ ਦੇ ਗੁਰਜ ਸਮਾਇਆ ਹੋਇਆ ਉਹਨਾਂ ਦਾ ਲੋਕ ਜਿਸ ਸਮਾਇਆ ਹੋਇਆ ਦੋ ਇੱਕ ਦੂਏ ਜਿਸ ਸਮਾਇਆ ਹੋਏ ਨੇ ਨਾਮ ਚਿਤਵਾਂ ਨਾਮ ਵਿੱਚ ਜਪਦੇ ਨੇ ਨਾਮੋ ਕੋਲੇ ਨਾਮ ਲਈ ਪੜਦੇ ਨੇ ਨੁਰੂਹੀ ਪੜਦੇ ਨੇ ਨਾਮ ਹੀ ਰਹੇ ਲਿਬਲਾਏ ਨਾਮ ਦੇ ਨਾਲੇ ਲਿਬਲਾ ਕੇ ਰੱਖਦੇ ਨੇ ਹਾਂਜੀ ਨਾਮ ਪਦਾਰਥ ਪਾਈ ਹੈ ਚਿੰਤਾ ਗਈ ਬਿਲਾਏ ਸਤਗੁਰ ਮਿਲਿਆ ਨਾਮ ਉਪਜੇ ਤ੍ਰਿਸ਼ਨਾ ਕੁੱਖ ਸਭ ਜਾਈ ਨਾਮ ਪਦਾਰਥ ਪਾਈ ਹੈ ਨਾਮ ਪਦਾਰਥ ਪਾਲਿਆ ਉਹਨਾਂ ਨੇ ਪਾ ਲੈਂਦੇ ਦੇ ਨਾਮ ਪਦਾਰਥ ਇਸ ਤਰੀਕੇ ਇਹੀ ਤਰੀਕਾ ਨਾਮ ਪਦਾਰਥ ਪਾਉਣ ਦਾ ਚਿੰਤਾ ਗਈ ਬੁਲਾਏ ਚਿੰਤਾ ਦੂਰ ਹੋ ਜਾਂਦੀ ਹੈ ਚਲੀ ਜਾਂਦੀ ਹੈ ਸਤਗੁਰ ਮਿਲੀ ਜਾ ਨਾਮੁ ਸੁਖ ਮਿਲੇ ਤੈ ਇਧਰ ਉਹਨੂੰ ਤੈ ਉੱਧਰ ਫਿਰ ਅੰਦਰੋਂ ਉੱਧਰੋਂ ਨਾ ਪੈਰੋ ਜਾਂ ਇੱਕ ਵਾਰ ਵਿੱਚ ਜੇ ਹੋ ਜਾਂਦਾ ਫਿਰ ਅੰਦਰੋਂ ਨਾ ਪੈਰੋ ਹੁੰਦੇ ਤੇ ਜਿਨਾ ਸਮਝ ਆਏ ਤੇ ਤਿਸ਼ਾ ਕੋ ਗੁਜ਼ਾਰੀ ਚਲੀ ਜਾਂਦੀ ਹੈ ਹਾਂਜੀ ਨਾਨਕ ਨਾਮੇ ਰਤਿਆਂ ਨਾਮੋ ਪੱਲੇ ਪਾਏ ਅਨ ਕਹਦਾ ਜਦੋਂ ਲੋਭ ਦਾ ਰੰਗ ਚੱਲ ਜਾਂਦਾ ਨਾਮ ਪੱਲੇ ਪੈ ਨਾਮ ਪੱਲੇ ਪਹਿਣਾ ਹੋਰ ਕੀ ਹੈ ਆਪੇ ਜਗਤੁ ਪਾਇਕੈ ਤੁਧ ਆਪੇ ਵਸਗਤ ਕੀਤਾ ਇਕ ਮਨੁਖ ਕਰ ਹਰਾਇਣ ਇਕ ਨਾਮੇਲ ਗੁਰੂ ਤੇ ਨਾਲ ਜੀਤਾ ਤੁਹਾਨੂੰ ਆਪੇ ਜਗਤੋਂ ਪਾਇਆ ਆਪੇ ਜਗਤ ਪੈਦਾ ਕੀਤਾ ਹਾਲ ਨੇ ਆ ਤੁਹਾਨੂੰ ਆਪੇ ਬਸਰਤ ਕੀਤਾ ਤੇਰੇ ਹੀ ਬਸ ਵਿੱਚ ਹੈ ਜੰਤ ਸਾਰਾ ਇੱਕ ਮਨੁੱਖਾ ਸਾਰਾ ਹਾਰ ਆਇਆ ਇਕਦਾ ਨੂੰ ਮਨੁੱਖ ਬਣਾਤਾ ਉਹਨਾਂ ਹਾਰ ਮਨੁੱਖੀ ਦੀ ਹੁੰਦੀ ਹੈ ਹਾਰ ਕੇ ਬਾਜੀ ਉਹਨਾਂ ਦੀ ਜਾਣੇ ਜਿਹੜੇ ਮਨੁੱਖ ਨੇ ਉਹਨਾਂ ਨੇ ਬਾਜੀ ਹਾਰ ਜਾਣੀ ਮੇਲ ਗੁਰੂ ਇਕਨਾਂ ਨੂੰ ਮਨੁਮੁਖ ਬਣਾ ਕੇ ਹਰਾ ਦਿੱਤਾ ਤਾਂ ਹਾਰ ਉਹ ਹਾਰ ਗਏ ਜੀਵਨ ਦੀ ਬਾਜੀ ਇਕਨਾਂ ਨੂੰ ਐਸਾ ਗਿਆਨ ਗੁਰੂ ਨਾਲ ਮਿਲਿਆ ਉਹਨਾਂ ਨੇ ਬਾਜੀ ਜਿੱਤ ਲਈ ਉਹਨਾਂ ਨੇ ਆਪਣਾ ਮਨ ਜਿੱਤ ਲਿਆ ਉਹ ਜਿੱਤ ਲਿਆ ਤੇ ਜੀਵਨ ਦੀ ਬਾਜੀ ਵੀ ਜਿੱਤ ਲਈ ਚੰਨ ਪਦਾਰਥ ਵੀ ਜਿੱਤ ਲਿਆ ਅੱਛਾ ਜੀ ਇਕਨਾਂ ਦਾ ਸ਼ਬਦ ਗੁਰੂ ਨਾਲ ਮੇਲ ਹੋ ਗਿਆ ਹੈ ਹਾਂ ਠੀਕ ਹੈ ਹਰ ਉੱਤਮ ਹਰ ਪ੍ਰਭ ਨਾਮ ਹੈ ਗੁਰਬਚਨੀ ਸੁਭਾਗੇ ਲੀਤਾ ਦੁਖ ਦੁਖਦਾਨਦ ਸਭੋ ਲਹਿ ਗਿਆ ਜਾ ਨਾਉ ਗੁਰੂ ਹਰ ਦਿੱਤਾ ਆ ਜਿਹੜਾ ਉਤਮ ਕੀ ਹੈ ਸਭ ਤੋਂ ਹਰ ਪ੍ਰਭ ਦਾ ਨਾਮ ਉਤਮ ਆਇਆ ਹਰ ਉਤਮ ਗੁਰਬਚਨੀ ਸੁਭਾਗੇ ਲੀਤਾ ਕਿ ਜਿਹੜੇ ਸੁਭਾਗੇ ਨੇ ਉਹ ਗੁਰਬਾਣੀ ਦੇ ਬਚਨਾਂ ਚੋਂ ਗੁਰਬਾਣੀ ਚੋਂ ਪ੍ਰਾਪਤ ਕਰ ਲੈਂਦੇ ਨੇ ਉਹੀ ਪ੍ਰਾਪਤ ਕਰਦੇ ਨੇ ਆ ਭਾਗੇ ਪ੍ਰਾਪਤ ਕਰਦੇ ਦੁੱਖ ਦਾਲਤ ਸਭੋ ਲੈ ਗਿਆ ਉਹਨਾਂ ਦਾ ਦੁੱਖ ਕਲੇਟਰ ਸਾਰਾ ਦੂਰ ਹੋ ਜਾਂਦਾ ਹੈ ਜਾ ਗੁਰੂ ਹਰ ਦੀਤਾ ਸਰ ਗੁਰੂ ਨੇ ਪਰਮੇਸ਼ਰ ਨੇ ਆਪਣਾ ਨਾਮ ਦਿੱਤਾ ਸਾਰਾ ਦੁੱਖ ਤੇ ਦੂਰ ਹੋ ਗਿਆ ਐਸੇ ਗੁਰੂ ਹਰ ਦੀਤਾ ਇਹਦਾ ਕੀ ਭਾਵ ਬਣਦਾ ਜੀ ਕਿ ਗੁਰੂ ਨੇ ਹਰ ਨਾਮ ਦੇ ਦਤਾ ਇਹਨਾਂ ਨੂੰ ਸਿੱਧਾ ਜਾ ਲੱਭਦਾ ਜਾਣੀ ਹੈ ਉੱਤੇ ਬੱਦੀ ਲਾਵੀ ਬੈਠੇ ਸੀ ਪਤਾ ਨਹੀਂ ਕੌਣ ਹੈ ਬੱਦੀ ਲਾਉਣ ਵਾਲਾ ਜਾ ਲੱਗਦਾ ਜਦੋਂ ਉਹਨਾਂ ਨੂੰ ਦਰਗਾਹ ਤੋਂ ਨਾਮ ਮਿਲ ਗਿਆ ਨਾ ਸਿੱਧਾ ਤਾਂ ਸਾਰਾ ਮਸਲਾ ਖਤਮ ਹੋਇਆ। ਕਿ ਹਰ ਤੋਂ ਹੀ ਨਾਮ ਮਿਲਦਾ ਹੈ ਸਤਗੁਰ ਤੇ ਨਾਮ ਪਾਇਆ ਜਾਏ। ਸਤਗੁਰ ਨੂੰ ਸਿੱਧਾ ਮਿਲ ਲੈ ਸਤਗੁਰ ਤੋਂ ਹੀ ਇਹ ਨੂੰ ਸੁਣ ਲੈ ਸ਼ਬਦ ਗੁਰੂ ਨੇ ਹਰ ਨੂੰ ਹਰ ਦੇ ਅੰਦਰ ਬੋਲਿਆ ਅੰਦਰ ਹਰੀ ਦਾ ਹੀ ਗਿਆਨ ਦਿੱਤਾ ਉਹਦਾ ਹੀ ਗਿਆਨ ਦਿੱਤਾ ਹੋਰ ਕੀ ਦਾ ਦਿੱਤਾ। ਹਾਂ ਜੀ। ਸੇਵੋ ਮੋਹਨੋ ਮਨ ਮੋਹਨੋ ਜਗ ਮੋਹਨੋ ਜਿਨ ਜਗ ਤੂੰ ਪਾਏ ਸਭੋ ਵਸ ਕੀਤਾ ਸਭੋ ਤੇ ਬੋਹਲੂ ਆ ਮੋਹਨਾ ਕ੍ਰਿਸ਼ਨ ਮੋਹਨ ਕਹਿੰਦੇ ਮੋਹਲੂ ਉਸ ਮੋਹਨ ਨੂੰ ਸੇਵੋ ਸਾਰੇ ਜਿਹੜਾ ਜਿਹੜਾ ਮਨਮੋਹ ਜਿਹੜਾ ਮਨਮੋਹ ਜੇ ਉਹ ਹੋਵੇ ਤਾ ਉਤੋਂ ਮਾ ਕੇ ਮੂਰਤੀ ਕੋਲੋਂ ਘੱਲੋ ਨਾ ਜਾਵੇ ਜਦੋਂ ਮਨ ਮੋਇਆ ਜਾਂਦਾ ਫਿਰ ਦੀ ਝੱਟ ਕੇ ਆਉਂਦਾ ਮਨਮੋਹਨ ਨੂੰ ਜਗ ਮੋਹਿਆ ਜਾਂਦਾ ਫਿਰ ਮਨ ਮੋਹਣ ਨੂੰ ਛੱਡ ਕੇ ਨਹੀਂ ਆ ਸਕਦਾ ਉਹ ਹੋਰ ਸਾਡੀ ਦੁਨੀਆ ਛੱਡ ਦਿੰਦਾ ਉਹ ਨੂੰ ਛੱਡ ਕੇ ਆਉਂਦਾ ਜਗ ਮੋਹਣ ਸਾਰੇ ਜਗ ਸਾਰੇ ਨੂੰ ਉਹ ਲੈਂਦਾ ਸਾਰੇ ਜਗ ਦੇ ਵਿੱਚ ਜਿੰਨੇ ਵੀ ਉਹ ਸਾਰੇ ਇਕੱਠੇ ਜੁੜ ਜਾਂਦੇ ਨੇ ਉੱਥੇ ਜਿਹਨੇ ਜਗ ਤੋਂ ਪਾਇ ਸਭੋ ਕੀਤਾ ਜਿਹਨੇ ਜਗਤ ਪੈਦਾ ਕੀਤਾ ਔਰ ਫਿਰ ਆਪਣੇ ਬਸ ਵਿੱਚ ਰੱਖਿਆ ਹੋਇਆ ਉਹ ਹੈ ਮੋਹਣ ਦੂਜਾ ਹੋਰ ਕੋਈ ਮੋਹਣ ਹੈ ਜੀ ਕਹਿਣ ਦਾ ਮਤਲਬ ਇਹ ਹੈ ਪਰ ਉਹ ਕ੍ਰਿਸ਼ਨ ਨੇ ਤਾਂ ਜਦ ਪੈਦਾ ਨਹੀਂ ਕੀਤਾ ਉਹ ਕਹਿਣ ਦਾ ਮਤਲਬ ਹੈ ਕ੍ਰਿਸ਼ਨ ਨੂੰ ਤੇਈ ਮੋਹ ਨਹੀਂ ਕਹਿ ਸਕਦੇ ਆਪਾਂ ਇਹ ਗਲਤੀ ਕਰਦੇ ਆਂ ਕਹਿ ਕੇ ਤੇ ਆ ਇਹ ਛੋਟਾ ਉਹ ਬੜਾ ਅਸਲੀ ਉਹ ਐਨ ਅਸਲੀ ਐਂ ਕਹ ਲਓ ਠੀਕ ਹੈ ਚਿਤਵਸਥੀ ਆਇਆ ਹੈ ਜੀ ਤਾਂ ਇਹ ਤਾਂ ਸ਼ਬਦ ਗੁਰੂ ਵਾਸਤੇ ਆਇਆ ਪੈਦਾ ਉਹ ਨਹੀਂ ਕੀਤਾ ਜੱਗ ਸਾਰਾ ਉਹ ਤੇਰੇ ਸ਼ਬਦ ਦੇ ਵਿੱਚ ਸਮਾ ਜਾਂਦਾ ਨਾ ਹਰ ਜੱਗ ਸ਼ਬਦ ਜਿਲੀ ਰੂਦਾ ਫਿਰ ਉਹ ਕਹਾਂ ਸ਼ਬਦ ਦੀ ਗੱਲ ਕਰਦਾ ਠੀਕ ਹੈ ਜਿਹੜਾ ਬਾਬਾ ਮੋਹਣ ਵਾਲੀ ਕਥਾ ਇਹਨਾਂ ਨੇ ਬਣਾਈ ਹੋਈ ਹੈ ਤਾਂ ਇੱਥੋਂ ਪਤਾ ਲੱਗਦਾ ਹੈ ਵੀ ਇਹ ਤਾਂ ਚੇਤਨ ਹੈ ਕੋਈ ਮੋਹਣ ਚੇਤਨ ਹੁੰਦਾ ਬਾਹਣ ਉਹ ਜੜੋਂ ਦਾ ਬਾਹਣ ਉਹ ਤਾਂ ਕੋਈ ਕਹਿੰਦੇ ਬਾਬਾ ਮੋਹਣ ਕੋਲ ਪੋਤੀਆਂ ਸੀ ਉਹ ਤਾਂ ਸਮਾਧੀ 'ਚ ਬੈਠੇ ਸੀ ਦਾ ਮੁੰਡਾ ਗੋਲ ਪੁੱਟੀਆਂ ਵੀ ਐ ਨਹੀਂ ਸੀ ਝੂਠ ਬੋਲਦੇ ਨੇ ਅੱਛਾ ਜੀ ਪੋਤੀਆਂ ਰੱਖੀਆਂ ਹੀ ਨਹੀਂ ਤਾਂ ਪਹਿਲਾਂ ਹੀ ਨੇ ਦੇਤੀਆਂ ਉੱਤੇ ਪਾਸ਼ਾ ਕੋਲ ਸੀ ਪੋਤੀਆਂ ਤਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਵੀ ਸੀ ਗੁਰਬੰਧ ਦੀ ਬਾਣੀ ਵੀ ਹੈ ਗੁਰੂ ਅਮਰਦਾਸ ਦੀ ਬਾਣੀ ਵੀ ਹੈ ਇਹ ਸਾਰੀਆਂ ਹੀ ਪੋਤੀਆਂ ਗੁਰੂ ਰਾਮਦਾਸ ਕੋਤਿਆਂ ਗੁਰੂ ਅਮਰਦਾਸ ਨੇ ਪੋਤੀਆਂ ਦਿੱਤੀਆਂ ਸੀ ਬਾਣੀ ਉਹਨੂੰ ਸਾਰੀ ਪੋਤੀਆਂ ਜਿਹਨੂੰ ਪੁਰੀਆ ਨਾਲ ਨਹੀਂ ਸੀ ਰੌਲਾ ਉਹਨਾਂ ਨੂੰ ਉਹਨਾਂ ਨੂੰ ਰੌਲਾ ਜ਼ਿਆਦਾ ਨਾਲ ਸੀ ਜ਼ਿਆਦਾ ਲੋ ਕਹਿੰਦੇ ਵੀ ਛੱਡ ਕੇ ਭਾਈ ਇੱਥੇ ਚਲੇ ਜਾਓ ਉਹ ਉੱਥੇ ਛਡਾ ਦਦੇ ਤੇ ਲੋਕ ਉੱਥੇ ਆਉਨੇ ਤੇ ਘਰ ਛਡਾਵਾ ਛੜੂਆ ਕੋਈ ਤੇ ਚਲੀ ਜਾਂਦੀ ਸੀ ਉਹ ਗੱਲਬਾਤ ਉਹਨਾਂ ਦੀ ਫਿਰ ਬੰਦੂਦ ਹੋ ਜਾਂਦਾ ਸੀ ਉਹਦੇ ਉਹ ਫਿਰ ਜਿੱਧਰ ਗੁਰੂ ਉੱਤਦਾ ਸੀ ਉਧਰ ਜਾਣ ਲੱਗ ਜਾਂਦੇ ਸੀ ਸਭ ਪਰ ਇਹ ਜਿਹੜਾ ਮੋਹਨ ਉਹ ਇੱਥੇ ਆ ਰਿਹਾ ਸ਼ਬਦ ਗੁਰੂ ਵਾਸਤੇ ਆ ਰਿਹਾ ਜੀ ਹੈ ਨਾ ਠੀਕ ਜਗ ਮੋਹਨ ਜਗ ਨੂੰ ਮੋਹਣ ਵਾਲਾ ਹਾਂ ਸਾਰੇ ਸੰਦਾਨ ਨੂੰ ਹੀ ਬੋਲਦਾ ਫਿਰ ਜਗ ਮੋਹਨ ਉਹ ਹੁਣ ਸ਼ਬਦ ਗੁਰੂ ਵਾਸਤੇ ਆਊਗਾ ਠੀਕ ਹੈ ਜਿਹਨੇ ਜਗ ਤੂੰ ਪਾਏ ਹਾਂ ਜੱਗ ਤੋਂ ਪਾਇਆ ਸਭ ਉਸਕੀ ਕਸਾਰੇ ਜੱਗ ਤੋਂ ਉਸੇ ਨਾਲ ਪਾਇਆ ਠੀਕ ਹੈ ਜੀ ਤੇ ਹੁਕਮ ਨਾਲ ਵਸ ਕੀਤਾ ਹੋਇਆ ਹੈ ਨਹੀਂ ਆ ਗਿਆ ਠੀਕ ਹੈ ਜੀ ਇੱਥੇ 11ਵੀਂ ਪੌੜੀ ਸਮਾਪਤੀ ਹੈ ਜੀ